ਫਰੀਦਾ ਰਤੀ ਰਤਨਾ ਨਿਕਲੇ ਜੇ ਤਨ ਜੀਰੇ ਕੋਏ ਜੋ ਤਨ ਰਤੇ ਰੱਬ ਸਿਓ ਤਿੰਨ ਹੋਏ ਰਤੇ ਨਹੀਂ ਉਹਦਾ ਰਤੀ ਰਤਨਾ ਨਿਕਲੇ ਨਾ ਨਾ ਨਾ ਆ ਨਿਕਲੇ ਥੋੜੀ ਜਿਹੀ ਵੀ ਉਹ ਰਤੀ ਆਦਾ ਰਤੀ ਜਿਹੜੀ ਜਿਹਦਾ ਵਜਨ ਕਰਦੇ ਉਹਦਾ ਇਹ ਜਦ ਨਾਲ ਤੋਲਦੇ ਨੇ ਰਤੀ ਹੈ ਥੋੜੀ ਜੀ ਇਕ ਬੂਦ ਰਤੀ ਰਤਨਾ ਨਿਕਲੇ ਜੇ ਤਾਂ ਜੀ ਕੋਈ ਆ ਰਤੀ ਰਤਨਾ ਨਿਕਲੇ ਕਬੜਾ ਰੱਤ ਬਣਾਉਣਾ ਸੀ ਨਾ ਜੇ ਰਤੀ ਦੀ ਰਤੀ ਹੋਈ ਵੀ ਬਣਾ ਦਾਂਗੇ ਅਸੀਂ ਜਿਹਨੂੰ ਨਾਮਦਾਰ ਅੰਗਟੜਿਆ ਹੋਇਆ ਉਹ ਤੇ ਰਤ ਹੁੰਦੀ ਗਲਦੀ ਉਹ ਲੋਭ ਰਤ ਨਹੀਂ ਹੁੰਦੀ ਹੋਰ ਮੁਝੇ ਪੀੜੀਓ ਤੇ ਲੋਭ ਰਤਮੀ ਨਿਕਲਦੀ ਜਿਹਨੂੰ ਨਾਮਦਾਰ ਅੰਗਟੜਿਆ ਹੋਇਆ ਅਸੀਂ ਹਰ ਤੇ ਵੀ ਕਰਦਾ ਮੇਰਾ ਰਤੀ ਰਤਨਾ ਨਿਕਲੇ ਜੇ ਤਨ ਜੀਰੇ ਕੋਏ ਜੇ ਤਨ ਜੀਰੇ ਕੋਏ ਜੀਦੇ ਜਿਹੜਾ ਨਾਮ ਦਾ ਕੇ ਵੀ ਦੇਖ ਨਿਕਲਦਾ ਲੋਭ ਰੱਖ ਦਿੱਤ ਗੁਰੂ ਜੋ ਰਤਨ ਗਏ ਰੱਬ ਸਿਉ ਤਿੰਨ ਤਨ ਰਤਨਾ ਹੋਏ ਜੋ ਤਨ ਰਤੇ ਜੀ ਨਾ ਸਾਚੀ ਦਾ ਰਖਿਆ ਰੱਬ ਦਾ ਰਖਿਆ ਹੈ ਉਹਨਾਂ ਦੇ ਅੱਗੇ ਲੋਭ ਰਤੂਦੀ ਹੋਈ ਨਹੀਂ क्योंकि ਕਿ ਇਹਨੇ ਰਾਤ ਦੀ ਡੈਫੀਨੇਸ਼ਨ ਨਹੀਂ ਦਿੱਤੀ ਕਬੀਰ ਨੇ ਉਹ ਰਵਰਦਾਸ ਨੇ ਇਹਨੂੰ ਲੋਵ ਰਤ ਕਹ ਕੇ ਦੀ ਡੈਫੀਨੇਸ਼ਨ ਦਿੱਤੀ ਅੱਗੇ ਨਾਲ ਤਾਂ ਹੀ